लोकमहल्ला चौथा हर सत निरंजन अमर है निरपव निर्वैर निरंकार हर सत नरका अमर और है आगेला है हर पूर्वखरा हरा जो और मरा करता हमारी सारी ਬਭਨ ਹਰੀ ਹੈ ਇਹ ਚਾਰੀ ਬਰਦੇ ਨੇ ਸਾਡੀ ਤੇ ਅਰੇ ਵਿੱਚ ਹਰੀ ਬਹਰੀ ਪੜੀ ਜਾਂਦੀ ਹੈ ਅਪੁਤੀ ਚੁਤੀ ਬਸਤੁਤੀ ਸਿਵੁਤੀ ਸਾਰੇ ਚਾਰੀ ਅਭਰੀਓ ਪੜੀ ਜਾਂਦੀ ਹੈ ਸੁਰੂ ਭਰੀ ਸਤਨਨ ਅੰਨ ਨੂੰ ਮਹਾਰ ਕਰੀਏ ਜਨ ਕੋਹ ਬੋਲ ਰਿਹਾ ਤੇ ਆਪਕੀ ਇਹਨਾਂ ਹਸਤੀਆਂ ਇਹ ਨਿਕੰਦ ਆਚਣਾ ਬਾਇ ਤੋਂ ਰਹਤਾ ਹੈ ਬਾਇ ਜਿਹਨੂੰ ਲਿੱਤੀ ਅਲਤ੍ਰੈਂਡ ਆਇਆ ਤੋਂ ਕਿਉਂਕਿ ਆਇਆ ਤੇਰੀ ਪੁਰਾਣੀ ਹੋ ਜਾਂਦੀ ਹੈ ਜਿਵੇਂ ਜੀ ਪੁਰਾਣੀ ਹੋ ਜਾਂਦੀ ਹੈ ਤੇ ਰੱਗੀ ਹੋ ਜਾਂਦੀ ਹੈ ਹਾਂ ਆ ਜਾਨ ਹੋਦਾ ਰੰਤਾ ਬੋਲਦਾ ਰੰਤਾ ਗਿਆਨ ਜਾਨਤਾ ਰੰਗ ਆਉਂਦਾ ਚੜਦਾ ਇੱਕ ਪਰੇਕੁ ਪਾਰ ਤੇ ਨਾ ਮਿਹਰੇ ਦੀ ਹੋ ਪੜੀ ਚਾਹੇ ਨਾ ਕਾੜੀ ਨਾ ਕੋ ਦਸਤੇ ਰਹਿ ਹਾਂ ਜਿਨ ਜਪਿਆ ਇੱਕ ਮਨ ਇੱਕ ਚਿੱਤ ਤਿਨ ਲੱਥਾ ਹਉ ਮੈਂ ਭਾਰ ਕਿ ਜੇ ਤੋ ਹੋ ਕੇ ਜੱਫੇ ਆ ਜਾਣੇ ਜੀਰ ਕੋਈ ਲੜਨ ਵਾਲਾ ਨਾ ਜਾਣੇ ਤੂੰ ਸੁਝੂ ਜਾਂ ਚੱਲ ਜਾਂ ਜਾਂ ਜਾਂ ਜਾਣ ਰਹੇ ਸੀ ਉਹ ਤਾਂ ਸੀ प्रमाने ज्ञाने अनु जपेदा उदर ज्ञाने ज्ञाने का ज्ञान न जिन गुरमुख जयकार कोई निंदा करे पूरे सतगुरु की किसनु फिट फिट कहै सब संता जहां गुरमुखिया ਗੁਰਮੁਖੀ ਗੁਰਮੁਖੀ ਆਰਾ ਦੇਣਾ ਤਨ ਸਾਥ ਜੇ ਗੁਰੂ ਜੀ ਦਾ ਗੁਰਮੁਖੀ ਤੋ ਬਿੱਟ ਹੈ ਸਭ ਸੰਸਾਰ ਕੋਈ ਜਦੋਂ ਸਾਰੇ ਪੂਰੇ ਸਤਿਗੁਰੂ ਕੇ ਕੋਈ ਪੂਰੇ ਸਤਿਗੁਰੂ ਦੀ ਦੁਸਤਾ ਕਰੇ ਸਤਿਗੁਰੂ ਨਾ ਵਰਤੇ ਕੋਈ ਵਰਤੇ ਹਾਂਜੀ ਹਾਂ ਪਰਿਵਿਸ਼ਰ ਲੋਕ ਜਿਹੜੇ ਵਿਅਕਤੀ ਗੁਰੂ ਪਰ ਕਰਨਾ ਪੂਰੇ ਸਤਿਗੁਰੂ ਦੀ ਦੰਦਿਆ ਜਿਹੜੇ ਵਿਅਕਤੀ ਗੁਰੂ ਰੋਡ ਕਰਦੇ ਗੁਰੂ ਮਿਲਦੇ ਉਹਦਾ ਸ਼ਰੀਰ ਵੈਰਾ ਸਾਡੇ ਨਾਲ ਗੁਰੂ ਇੱਕੋ ਹੀ ਹੈ ਗੁਰੂ ਦੂਜੇ ਨਹੀਂ ਹੁੰਦਾਔਰ ਅੰਤੈ ਦਾ ਉਤਾਰਾ ਸੋਈ ਗੁਰੂ ਤਾਂ ਕਿਹਾ ਲੱਖ ਜੋਗ ਦੀ ਭਾਸ਼ਾ ਜਾਣਦਾ ਹੈ ਸਾਚੇ ਤੋਂ ਕੋਪਰ ਕੁਰਬਾਨੀ ਕਰੀਓ ਕਰ ਲੈ ਕਰਦੇ ਇੱਥੇ ਮੱਤ ਭੇਜ ਲੈ ਕੁਰਬਾਨੀ ਦਾ ਅਗੁਦੀਆ ਸੁਜੀ ਬਖਰਾ ਉਪਰ ਨਹੀਂ ਕਰਦਾ ਹੁਕਮ ਨਹੀਂ ਕਰਦਾ ਕਹੇ ਸਭ ਸੰਤਾਂ ਤੁਗੜ ਆਪ ਵਰਤਦਾ ਹਰ ਆਪੇ ਰਖਣਹਾਰ ਧਨ ਧਨ ਗੁਰੂ ਗੁਣ ਗਾਵਦਾ ਤਿਸ ਸਦਾ ਸਵਾ ਨਮਸਕਾਰ ਸਾਧਗੁਰੂ ਹੈ ਉਹ ਜਿਹੜਾ ਨੇ ਵਿੱਚ ਪੂਰਾ ਗੁਰੂ ਆਪ ਵਰਤਦਾ ਹੈ ਹੈ ਤੇ ਹਕਲਾ ਦਾ ਤਾਂ ਕੋਰੇ ਆਪਣੀ ਆਪ ਨੂੰ ਉੱਠੇ ਨਾ ਬੈਠੀ ਰਹੋ ਤੇ ਵੀ ਕੁਝ ਨਹੀਂ ਕੁਝ ਆਇਲ ਬੋਰਾ ਉਹ ਇਹ ਹੈ ਇਹ ਤਾਂ ਸੱਚ ਹੈ ਇਸ ਨੂੰ ਸੱਚ ਕਰਕੇ ਕੌਣ ਪੂਰੀ ਕਲਾ ਵਰਤੀ ਹੈ ਪੂਰੀ ਸਾਰੀ ਉਹ ਕਲਾ ਦੀ ਵਰਤਰੀਏ ਦੇ ਵਿੱਚ ਉਹੜਾ ਨਸਤਾਰੂ ਸਾਨੂੰ ਸੁਝਾਉਣ ਵਾਸਤੇ ਆ ਪੌੜੀ ਹੀ ਹੋਣ ਵਾਸਤੇ ਮੁਲਕਾੜ ਅਲਬੂਦੀਆ ਪੌੜੀ ਪਾਗਰੀ ਤੇ ਹੋਣ ਵਾਸਤੇ ਜਿਵੇਂ ਕਲਾ ਵਸਦੀ ਉਹ ਨਹੀਂ ਕੋਈ ਕਲਾ ਵਸਦੀ ਹੈ ਆਹ ਕਲਾ ਕਲਾ ਵਸਦੀ ਹੈ ਜਿਹਦੇ ਤੋਂ ਸਾ ਇਹੋ ਜਿਹੀ ਜੀਵ ਜਾਵਾ ਤਾਕਰੀ ਬਹੁਤ ਕੁਲ ਕਲਾ ਦਾ ਸੇਂਟਾਈ ਵਰਸ ਤੇ ਸਤਿਗੁਰੂ ਮਿਟੋ ਉਹ ਤਾਂ ਜਬ ਉਹ ਤਾਂ ਬੋਲ ਦੇ ਜੀਣ ਵਰਸ ਦੇ ਵਿੱਚ ਪਾਈ ਸਦਾ ਸਦਾ ਨਮਸਕਾਰ ਇਹ ਆਪਣੀ ਨਵਾਂ ਲੋਕ ਤਾਂ ਨਹਿਰੀਵਾ ਮੈਂ ਲਈ ਤੋੜ ਲਈ ਤੇਰਾ ਤਨ ਸੰਤ ਸੰਤ ਗੁਰੂ ਗੁਰੂ Hey guys ਇਹ ਗੱਲ ਕੀ ਕਰਦੇ ਆ ਅਸੀਂ ਉਹ ਬਜ਼ੇਦ ਉੱਪਰ ਬੈਠ ਕੇ ਕਰਦੇ ਉਹਦੇ ਕੋਲ ਗੱਲ ਲਾ ਦਿੰਦੇ ਹਾਂ ਜੀ ਦੇ ਪਰਮੇਸ਼ਨ ਦੇ ਗੁਰੂ ਦਾਏ ਜੀ ਇਹ ਗਲਤੀ ਅਸੀਂ ਕੀਤੀ ਹੋਈ ਹੈ ਫੁਰਨਾਮ ਦੇ ਬਾਰੇ ਗਲਤੀ ਇੱਥੇ ਹੋਈ ਹੈ ਜੀ ਹੁਣ ਦਿੱਤਾ ਹੈ ਗੁਰੂ ਨਾਲ ਨਹੀਂ ਨਾਲ ਜੋੜੇ ਨੇ ਇਹ ਗਲਤੀ ਕੀਤੀ ਹੈ ਇਹ ਗਲਤੀ ਰੋਕੀ ਹੋਈ ਹੈ ਇੱਥੇ और सर अर्पित करते रोकया आया सिगार ये अर्पित कर रहे थे हुई है श्री गुरु जी जिन नानक तिन जिन जपया सिर्जन हां ਪਰ ਕਾਨੇ ਵਰਬਾਨ ਦੇ ਦਰਕ ਜਾਨ ਸਰਜਨ ਵਾਲਾ ਜਪਿਆ ਤੂੰ ਕਿਵੇਂ ਆ ਗਏ ਨਾਲ ਦੇ ਪੁਰਬਾਨ ਹੋਏ ਆਪਾਂ ਨੇ ਉਹਨਾਂ ਦੇ ਪੁਰਬਾਨ ਨੂੰ ਹੁਣ ਹੁਣ ਤੋਂ ਤੁਹਾਨੂੰ ਕਿਹਨੂੰ आपे ਦੇ साजियन आपे आकाश ਤੂੰ ਪੂਰ ਨਿਗਲਦੇ ਤੇ ਮਹੱਲਾ ਚੌਥਾ ਆਪੇ ਤਰਤੀ ਦਸੋਕ ਤਾਕੀ ਦੇ ਸਾਰੇ ਜੱਗ ਦੇ ਕੌਣ ਕਰਤੀ ਆਪ ਸੱਜੀ ਹੈ ਆਪੇ ਆਕਾਸ਼ ਆਤਮਵੀ ਉਹਨੇ ਸੱਜੇ ਹੈ ਆਪੇ ਦੇ ਅਣਜਲ ਦੇ ਆਗਾਇ ਦੇ ਜਿਹੜੇ ਜਿਹਨਾਂ ਤੋਂ ਪੈਦਾ ਹਿੱਤੇ ਨੇ ਉਹਨਾਂ ਹੀ ਪੈਦਾ ਹਿੱਤੇ ਨੇ ਉਹ ਗੁਰੂ ਹੈ ਇਹ ਆਉ ਬਸ ਕਿਤੇ ਕਿ ਆਪੇ ਜੰਤੋ ਬਾਇਲ ਮੁਕਾਪੇ ਸਹੀ ਗਰਾਸ ਖਾਰਿਆ ਨੂੰ ਖਾਣ ਦੀ ਭੁੱਖ ਜਿਦੇ ਰਿਹਾ ਐ ਕਿ ਤਾ ਕੋਈ ਕੰਮ ਕਰ ਲੂ ਹੋਰ ਕੋਈ ਸਚਾ ਆਦਮੀ ਹੈ ਕੰਮ ਕਰ ਲੂ ਸਾਰੇ ਲੋਭਪਤੀਆਂ ਦੇ ਵਿਕੇ ਦਾ ਜਤਾ ਐਡੀ ਸ਼ਕਤੀ ਦਾ ਵਾਲਖ ਗੁਰੂ ਹੈ ਜੀ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾ ਆਪੇ ਆਪ ਦਾ ਹਜੜਾ ਆਪਿਆ ਵਰਦੈ ਹੁਕਮ ਰੂਪ ਆਪੇ ਆ ਆਪੇ ਹੀ ਗੁਣਤਾਸ ਐ ਜਿਹੜੇ ਗੁਣ ਨੇ ਵੀ ਉਹਦੇ ਹੀ ਹੋਣਦੇ ਨੇ ਉਹਦੇ ਦੇ ਸਮਰਥਾ ਉਹਦੇ ਆਪਣੇ ਵਿੱਚ ਜਨ ਨਾਨਕ ਨਾਮ ਧਿਆਇ ਤੂੰ ਸਭ ਕਿਲ ਵਿੱਚ ਕੱਟੇ ਤਾਸ तू सच्च सच्चा साहिब सत्य ਹੈ सत्य सच्चे भावे जो तुद सत्य तनाहंदी तिन जम कंकड़ नेल ना आवे तू सच्चा साहिब सच्चा तू सच्चा साहिब कासु रूप विशरन भावा ਨਕੇ ਮੁਖ ਦਰ ਉਜਲੇ ਜਿਨ ਹਰ ਹਿਰਦੇ ਸੱਚਾ ਭਾਵੈ ਕੂੜਿਆਰ ਪਿਛਾਂ ਹ ਸਕਤੀਆਂ ਹਿਰਦੇ ਕਪਟ ਮਹਾਂਤੁ ਪਾਵੈ ਜਿਨ ਦੇ ਮੁਖ ਦਰ ਮੁਖ ਕੋਈ ਦਾਰੇ ਨਹੀਂ ਉਸ ਦਾ ਕੋਈ ਕਾਲ ਨਹੀਂ ਉਸ ਦਾ ਜਿਹਨਾਂ ਸੱਚਾ ਭਾਵੈ ਜਿਨਾਂ ਕੱਟਾ ਜਿਵੇਂ ਪਹਾੜਾਂ ਦੇ ਵਿੱਚ ਪਉਂਦਾ ਹੈ ਨਾ ਆਉਂਦਾ ਰਹਿੰਦਾ ساری ਜ਼ਿੰਦਗੀ ਉਹਨਾਂ ਦੇ ਦਰਵਾਜ਼ੇ ਚੜ੍ਹਦੇ ਨੇ ਉਹਦੇ ਨੇ ਬੋਖਦੇ ਨੇ ਇਹ ਦੇ ਦੱਸੇ ਜਾਂ ਤੱਤੀਆਂ ਉਹ ਇਹਦੇ ਤਰਸ ਮਨ ਨੂੰ ਦੁੱਖ ਪਾਵੇ ਤਾਂ ਆਲਾ ਪਿੱਛੇ ਕੂੜੇ ਆ ਰੀਆਂ ਕੂੜੇ ਆ ਕੂੜੋ ਹੋਏ ਜਾਂਦੇ ਕੂੜੇ ਆ ਦੇਖੇ ਤੇ ਕੂੜੇ ਆ ਕੂੜੇ ਆ ਘਰ ਦੀ ਸਵਾਜ ਬੰਦੇ ਦੇ ਕੂੜੇ ਖਿਲਾਫ done <laughs>